श्लोक महल्ला 5वा जाचड़ी सा सार जो जांच दी एकड़ो है, जा है जाचड़ी कहनने ने गुणवती गुण वाली ओहो है जेडी इक चीज मांगदी है ओ भी सार है इक चीज मांगदी है सार रूप है ਉਦੇ ਨਾਲ ਵੀ ਦੂਜੀ ਚੀਜ਼ ਨੀ ਹੈ ਜਿਕੜੋ ਠੀਕ ਹੈ ਕਿਹੋ ਜੀ ਜਬਦੀਆਂ ਉਹ ਉਸ ਚੀਜ਼ ਸਾਰ ਰੂਪ ਹੈ ਸਾਰ ਕਾਲੀ ਬਿਆ ਬਕਾਲ ਬਾਕੀ ਗੱਲਾਂ ਨੇ ਸਭ ਬਕਾਲ ਨੇ ਬੇਕਾਲ ਗੱਲਾਂ ਦਾ ਵਕਾਰ ਪੈਦਾ ਕਰ ਨਾਲੀਆਂ ਨੇ ਨਾਨਕ ਤਲੀਮ ਹੁੜੀਓ ਜਿਹਦੇ ਵਿੱਚ ਧਰੀ ਦਾ ਜ਼ਿਕਰੇ ਨਹੀਂ ਹੈ ਤੇ ਵਿੱਚ ਮਾਲਕ ਦਾ ਜ਼ਿਕਰੇ ਨਹੀਂ ਹੈ ਉਹ ਗੱਲਾਂ ਉਹਦਾ ਵਜੂਨ ਗੱਲਾਂ ਨੇ ਇਹਦੇ ਵਿੱਚ ਸੱਚ ਦਾ ਜ਼ਿਕਰੇ ਵੀ ਹੈ ਉਹ ਸਾਰਾ ਇਤਿਹਾਸ ਬੇਕਾਰ ਹੈ ਉਹ ਗੁਰੂਆਂ ਦੀ ਗੱਲਾਂ ਨੇ ਠੀਕ ਹੈ ਸਾਬ ਜ਼ਿਕਰ ਦੀ ਹੈ ਇਤਿਹਾਸ ਵੀ ਅਜਿਹੇ ਲਿਖ ਮਾਰੇ ਤੁਹਾਡਾ ਪਾਣੀ ਜਾਂ ਸਰਮਾ ਗਈ ਸੀ ਤੂੰ ਕੀਤਾ ਸੀ ਤੇ ਗੁਰੂਆਂ ਆ ਵੀ ਕਹਿਣਾ ਸੀ ਤਾਂ ਗੱਲਾਂ ਨੇ ਜਿਹੜੀਆਂ ਬੇਕਾਰ ਨੇ ਬਕਾਰਾਂ ਨਾਲ ਲੈ ਜਾਣੀਆਂ ਲੈ ਗਈਆਂ ਸਾਨੂੰ ਬੇੜਾ ਤਾਂ ਕਰਕ ਹੋਣਾ ਸੀ ਗੁਰੂ ਦੀ ਗੱਲ ਸੁਣੀ ਦੀ ਦੀ ਕਾਲੀ ਬਿਆ ਦੂਗੀਆਂ ਗੱਲਾਂ ਬੇਕਾਲ ਨੇ ਬੇਕਾਲ ਨੇ ਇਹਨਾਂ ਵਿੱਚ ਸੱਚ ਦਾ ਜ਼ਿਕਰ ਨਹੀਂ ਹੈ ਅਲੀ ਬਿਉੜੀਆ ਮਹਲਾ ਪੰਜਵਾਂ ਨਹੀਂ ਜੇ ਵਿਦਦਾ ਮਨ ਪਛਾਣੂ ਵਿਰਲੋ ਅਜਿਹਾ ਦਿੱਕਾ ਆਇਆ ਨਾ ਸਰੀਰ ਦੇ ਵਿੱਚ ਲੁਕਿਆ ਹੋਇਆ ਮਨ ਅਜੀਬ ਹੋ ਗਿਆ ਨਾ ਇੱਕ ਮਤ ਹਾਂਜੀ ਜਦੋਂ ਪਾਣੀ ਦੇ ਦੂਢ ਘੋਲਦੀ ਏ ਅਰ ਪਾਣੀ ਦਾ ਆਟਾ ਗੋਲਦੀ ਏ ਇਹਨਾਂ ਪਤਾ ਲੱਗਦਾ ਤੇ ਪਤਾ ਲੱਗਦਾ ਦੂਣ ਨਹੀਂ ਦੇਖਦਾ ਉਹ ਕਿਹੜਾ ਦੀ ਪਾਣੀ ਵੀ ਆਟਾ ਵੀ ਇਹ ਮੰਨਤਾ ਦੀ ਇਹਦੇ ਵਿੱਚ ਐਆਂ ਜਿਵੇਂ ਰੂਪ ਰੂਪ ਜਦ ਆਰ ਕੱਟ ਦਿੱਤੇ ਸਾਨੂੰ ਵਿੱਚ ਜਿਹੜਾ ਉਹ ਦੀਦੀ ਦਾ ਅਸਲ ਰੂਪ ਇਹ ਜਿਹੜਾ ਬਿੱਤਾ ਹੈ ਇਹਦੇ ਵਿੱਚ ਇਹਨੂੰ ਇਹਨੂੰ ਪਛਾਣਦੇ ਵਿਰਲੋਈ ਕੋ ਬੋਲਣ ਵਾਲਾ ਕੋਈ ਹੋਰ ਹੈ ਜਿਹਦੇ ਬੋਲਦਾ ਸਰੀਰ ਉਹ ਕੁਝ ਹੋਰ ਈ ਹੈ ਜਿਹੜਾ ਬੋਲਣ ਵਾਲਾ ਕਬੀਰ ਕਹਾਂ ਕਿਬੀਰ ਜੋ ਹਮ ਜੰਤ ਬਜਾਵਤੇ ਕਹਿੰਦਾ ਜਿਹੜਾ ਸਰੀਰ ਮੈਂ ਬਜਾਉਂਦਾ ਤੀ ਸਰੀਰ ਨੂੰ ਵਾਜਾ ਦੱਸਦਾ ਉਹ ਵਾਜਾ ਜੋ ਹਮ ਜੰਤ ਇਹ ਜੰਤ ਤਾਂ ਜੀ ਨਹੀਂ ਐ ਬਜਾਉਂ ਵਾਲਾ ਜੀ ਐ ਬੱਜਣ ਵਾਲਾ ਜੰਤਾ ਜੋ ਹਮ ਜੰਤ ਬਜਾਵਤੇ ਟੁੱਟ ਗਈ ਸਭ ਤਾਂ ਸਾਰੇ ਟੁੱਟ ਗਏ ਉਹਦੇ ਅਨਸਾਰੀ ਮੈਂ ਦੇਖੋ ਨਾ ਟੋੜ ਤੇ ਕੁਟਈ ਛੜਤੀ ਜੰਤ ਬਜਾਰਾ ਗਿਆ ਖਵੇ ਚਲੇ ਬਜਾ ਬਣਾਰ ਜਨਤਾ ਪੇ ਕੇ ਮ ਬਜੂਗਾ ਬਜਾਉਣ ਵਾਲਾ ਤਾਂ ਚੱਲ ਗਿਆ ਜੇ ਬਜਾਉਣ ਵਾਲਾ ਬਜਾਉਦਾ ਹੀ ਨਹੀਂ ਹੈ ਤੇ ਜਦ ਆਪੇ ਕੇ ਜਿਹਨੇ ਦੇਖਿਆ ਜਿਹਨੇ ਦੇਖਿਆ ਕਿਵੇਂ ਦੇਖਿਆ ਉਹ ਗੱਲ ਲਿਖੀ ਹੈ ਜਿਹਨੇ ਖੋਜਿਆ ਉਹਨੇ ਖੋਜਿਆ ਅਗਲੇ ਆਣੇ ਤੇ ਖੋਜਿਆ ਨੇ ਆਕੇ ਹਾਵੀ ਹੈ ਪਛਾਣਿਆ ਕਿਸੇ ਬੰਦੇ ਨੇ ਕਬੀਰ ਨੇ ਪਛਾਣਿਆ ਪਛਾਣਿਆ ਹਾਂਜੀ ਨੀ ਜੇ ਵਿੱਦਾ ਮਨ ਪਛਾਣੂ ਵਿਰਲੋ ਥਿਓ ਜੋੜਨ ਹਾਰਾ ਸੰਤ ਨਾਨਕ ਪੱਦਰ ਪਧਰੋ ਜੋੜਨ ਹਾਰਾ ਸੰਤ ਹੁਣ ਇਹਦੇ ਜੋ ਪਛਾਣਤਾ ਲਿਆ ਖਾਤਾ ਲਿਆ ਦਾ ਥੈ ਹਦੈ ਇਹਨੂੰ ਜੋੜਨਾ ਨਾ ਨਾਲ ਇਹਦੇ ਤਾਂ ਕੱਢ ਲਿਆ ਬਾਹਰ ਜੰਤ ਨਾਲ ਤੋੜ ਲਿਆ ਜੋੜਨਾ ਇਹਦੇ ਇਹਦੇ ਮੋੜਨਾ ਜੋੜਨਾ ਵਾਲਾ ਹੁਣ ਸੰਤ ਹੈ ਉਹ ਸੰਤ ਕਹਿੰਦੇ ਨੇ ਉਹਨੇ ਇਹਨੂੰ ਤੋੜ ਕੇ ਜੋੜ ਦੇ ਦਿੱਤੇ ਹੋਰ ਇਹਦੇ ਆਪਣੇ ਨਾਲ ਇੱਕ ਕਰਨਾ ਇਹਨੂੰ ਠੀਕ ਹੈ ਜੀ ਅੱਗੇ ਤਾਂ ਉਗੂਗੇ ਸੰਤ ਇੱਕ ਕਰ ਸਕਦਾ ਉਗੂਗਾ ਫਰਮੈਚਰ ਦੀ ਕਿਰਪਾ ਦੋ ਇੱਕ ਤਾਂ ਸੰਤ ਕਰ ਸਕਦਾ ਇਹਨੂੰ ਇੱਕ ਹੋਣ ਦੀ ਵਿਧੀ ਤੈਨੂੰ ਸਮਝਾ ਸਕਦਾ ਤੂੰ ਘਰ ਵੀ ਇੱਕ ਕਰ ਸਕਦਾ ਪਰ ਇੱਕ ਹੋਵੇ ਉੱਗਣ ਦੀ ਵਿਧੀ ਨਾਲ ਸੱਤ ਦੀ ਵਿਧੀ ਹੈ ਜਿਹੜੀ ਹੁਣ ਸਮਝਾਉਣ ਵਾਲਾ ਪਾਦਰ ਉਹ ਤਾਂ ਮੈਂ ਬੰਦ ਕੋਈ ਨਾ ਬੰਦ ਰੋ ਪਾਂਦਾ ਉਹ ਹੈ ਰਾਜ ਜਾਂ ਤੇ ਪਰ ਰਾਜ ਤੇ ਚੱਲਦਾ ਉਹ ਹੈ ਜਿਹੜਾ ਰੋਜ਼ ਤੁਰਿਆ ਵੀ ਜਾਂਦਾ ਉਹ ਮੈਂ ਵੀ ਜਾਂਦਾ ਜਾਂਦਾ ਵੀ ਠੀਕ ਹੈ ਪਰਦਾ ਜਾਂਦਾ ਜੰਗ ਦਾ ਜੰਗ ਰਤਾ ਪਰ ਦੋਸਤ ਨਹੀਂ ਹੈ। ਤਾਂ ਕਹਿੰਦਾ ਇੱਕ ਵਾਰ ਆਇਆ ਆਦੋ ਆਉਂਦਾ ਰਹਿਣਾ ਰੋਜ਼ ਦਾਤਾ ਬਖਸ਼ਿੰਦ ਕਿਲਵੇ ਕੇ ਸਭ ਬినాਸ਼ ਹੋਣ। ਸਿਮਰਤ ਗੋਬਿੰਦ। ਇਹ ਮੇਰੇ ਜਿਹੜੇ ਉਹਦੀ ਉਹਨੂੰ ਸੇਵੀ ਦਾਤਾ ਬਖਸ਼ਿੰਦ ਜਿਹੜਾ ਦਾਤਾ ਵੀ ਹੋਵੇ ਕੋ ਦਬੇ ਵੀ ਔਰ ਕੋ ਬਖਸ਼ਿਸ਼ ਵੀ ਕਰ ਜੋਗਾ ਹੋਵੇ ਬਖਸ਼ੇ ਵੀ ਪਿਛਲੇ ਉਗਣ ਵੀ ਬਖਸ਼ੇ ਬਖਸ਼ਿਸ਼ ਕਿਲ ਵਿੱਚ ਸਭ ਬਿਲਾਸ ਹੋਣਾ ਜਿਮਰਤ ਬੋਗੰਦ ਜਿਹੜੇ ਤੇਰੇ ਅੰਦਰ ਸਾਰੇ ਚਿੰਤਾਵਾਂ ਨੇ ਉਹਨਾਂ ਦਾ ਨਾਸ ਹੋਵੇ ਐਸਾ ਕੋ ਬੰਦਦਾ ਨਾਲ ਤੇਰੀ ਸਾਰੀਆਂ ਅੰਦਰਲੇ ਚਿੰਤਾਵਾਂ ਨਾਸ ਹੋ ਜਾਣ ਹਰ ਮਾਰਗ ਸਾਧੂ ਦੱਸਿਆ ਜਪੀ ਹੈ माया स्वाद सब ਸਭ ਿੱਕਿਆਂ ਹਰ ਮਨ ਪਾਵੰਦ ਵਾਇਆ ਸਵਾਦ ਖਬ ਿੱਕਿਆਂ ਹਰ ਮਨ ਪਾਵੰਦ ਜਿਹੜਾ ਹਰ ਮਾਰਗ ਦੱਸਿਆ ਨਾ ਸਾਧੂ ਨੇ ਹਰ ਕਾ ਮਾਰਗ ਜਿਹੜਾ ਗੁਰਤਾ ਜਿਹੜਾ ਗੁਰਮੰਤਰ ਜਪਣਾ ਆ ਗੁਰਬਾਣੀ ਇਹ ਨਾਮ ਨਹੀਂ ਹੈ ਨਾਮੇ ਦੇ ਵਿੱਚ ਸਮਾਇਆ ਹੋਇਆ ਹੈ ਜਪ ਕੇ ਨਾਮ ਅਡ ਹੋ ਜਾਣਾ ਮੁੱਖੜ ਜਪਣਾ ਨਾ ਮਾਤਰਾ ਹੁੰਦਾ ਲੜਕਣਾ ਬੁਲਾਉਣਾ ਜਪੀਏ ਗੁਰਮੁਖ ਬੁੱਤ ਤੇ ਜਪੀਦਾ ਹੁੰਦਾ ਹੈ ਜਪੀਦਾ ਹੁੰਦਾ ਸਮਝੀਦਾ ਹੁੰਦਾ ਵਿਚਾਰੀਦਾ ਹੁੰਦਾ ਮਾਇਆ ਸੱਪ ਫਿਕਰ ਹਰ ਸੁਧ ਭਾਵੰਤ ਜੇ ਹਰ ਐਸੀ ਬੁੱਧੀ ਭਾਵਨਾ ਹੋ ਜਾਂਦੀ ਹੈ ਮਨ ਦਾ ਸੁਭਾਅ ਐਸੇ ਬਦਲ ਜਾਂਦਾ ਹੈ ਕਹ ਜਿਹੜੇ ਮਾਇਆ ਦੇ ਸਾਰੇ ਸਵਾਦ ਮਿੱਠੇ ਪੈ ਜਾਂਦੇ ਜਿੰਦੇ ਸਾਰੇ ਸਵਾਦ ਸਾਰੇ ਫਿੱਕੇ ਪੈ ਨਾਨਕ ਪਰਮੇਸ਼ਰ ਜਿਨ ਦਿੱਤੀ ਜਿੰਦ ਧਿਆਨ ਕਿੱਥੇ ਟਿਕ ਜਾਂਦਾ ਪਰਮੇਸ਼ਰ ਦੇ ਵਿੱਚ ਧਿਆਨ ਟਿਕ ਜਾਂਦਾ ਕਿਹਦੇ ਜੀਵਨ ਦਾ ਅੰਦਤ ਜੀਵਨ ਦਾ ਧਿਆਨ ਉੱਥੇ ਜੁੜ ਜਾਂਦਾ ਠੀਕ ਹੈ ਜੀ